ਸਤਗੁਰੂ ਰਾਮ ਸਿੰਘ ਨੇ ਜਾਗਦੀ ਜੋਤ ਨਾਲ ਫੇਰ ਜੋੜ ਦਿੱਤਾ ਹੋਇਆ ਸਮਾਬਿਤ ਗਿਆ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਸਮਾ ਆਇਆ ਬਰਤ ਗੋਰ ਮੜੀ ਮੱਛ ਪੂਲ ਨਾ ਮੰਨ ਸਾਡੇ ਗੁਰੂ ਸਾਹਿਬਾਂ ਨੇ ਕਿਸ ਤਰ੍ਹਾਂ ਬਚਾਇਆ ਸਿੱਖਾਂ ਨੂੰ ਜੜ ਪੂਜਾ ਤੋਂ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਸਮਾ ਆਇਆ ਤੇ 1975 ਬਿਕਰਮੀ ਦਾ ਸਮਾ ਸੀ ਸਤਗੁਰੂ ਪ੍ਰਤਾਪ ਸਿੰਘ ਜੀ ਨੂੰ 12 ਸਾਲ ਹੋ ਗਿਆ ਗੱਦੀ ਤੇ ਬੈਠਿਆਂ ਨੂੰ ਇਕ ਥਾਂ ਨਮਾਣੀ ਦਾ ਮੇਲਾ ਹੁੰਦਾ ਹੁੰਦਾ ਸੀ ਆ ਜਿਹੜਾ ਹੁਣ ਅਸੂ ਵਿੱਚ ਹੁੰਦਾ ਐ ਇਸ ਮੇਲੇ ਦਾ ਨਾਮ ਸੀ ਨਮਾਣੀ ਦਾ ਮੇਲਾ ਨਮਾਣੀ ਦਾ ਮੇਲਾ ਹੁੰਦਾ ਸੀ ਸਾਧੂ ਸੰਤ ਮਹਾਤਮਾ ਆਉਂਦੇ ਹੁੰਦੇ ਸਨ ਸਤਿਗੁਰਾਂ ਦੇ ਨਾਲ ਬੜੇ ਬੜੇ ਸੁੰਦਰ ਸੰਤ ਸੋਹਣੇ ਆਪਣੇ ਵਧੀਆ ਜੀਵਨ ਵਾਲੇ ਜਿਹੜੇ ਰੱਬ ਨੂੰ ਪਹੁੰਚੇ ਹੋਏ ਸਨ ਰਾਤ ਦਿਨ ਸਿਮਰਨ ਲੱ ਵਾਲੇ ਉਹ ਸਤਗੁਰੂ ਪ੍ਰਤਾਪ ਸਿੰਘ ਦੇ ਚਾਰ ਚਫੇਰੇ ਦੇਖੇ ਜਾਂਦੇ ਸਨ ਸੰਤ ਆਲਾ ਸਿੰਘ ਜੀ ਵਰਗੇ संत प्रीतम सिंह जी चेले के संत भगत सिंह जी दाते वालीए संत मंगल सिंह जी अरशी फरिश्ता और भी कई संत महात्मा सतगुरुओं दे नाल चार चफेरे हर वक्त शोभा पाऊं दे सण इथे नमाणी दा मेला हो रिया सी 1975 दी बीकर्मी दा समा होया कि लंगर दे विच लंगरी संत करतार सिंह दे सण पीछो ए लंगर विच ਇੱਕ ਸਿੱਖ ਨੇ ਇਹਨਾਂ ਕੋਲ ਜਾ ਕੇ ਕਿਹੋ ਮੰਗਿਆ ਕਰਤਾਰ ਸਿੰਘ ਜੀ ਜਰਾ ਕਿਹੋ ਦੇਣਾ ਉਹਨਾਂ ਆਖਿਆ ਕੀ ਕਰਨਾ ਉਹਨਾਂ ਆਖਿਆ ਮੈਂ ਦੀਵਾ ਜਗਾਉਣਾ ਉਹਨਾਂ ਸਤਗੁਰੂ ਹਰੀ ਸਿੰਘ ਜੀ ਦੀ ਮੜੀ ਦੇ ਉੱਤੇ ਐ ਜਿੱਥੇ ਹਰੀ ਮੰਦਰ ਬਣਿਆ ਹੋਇਆ ਇੱਥੇ ਸਤਗੁਰੂ ਹਰੀ ਸਿੰਘ ਜੀ ਦਾ ਸਸਕਾਰ ਹੋਇਆ ਹੋਇਆ ਇੱਥੇ ਇੱਕ ਥੜਾ ਬਣਿਆ ਹੋਇਆ ਹੁੰਦਾ ਸੀ ਸਤਗੁਰੂ ਹਰੀ ਸਿੰਘ ਜੀ ਦੇ ਸਰਦਾਲੂ ਸਿੱਖ ਉੱਥੇ ਦੀਵਾ ਜਗਾਉਂਦੇ ਸਨ ਉਸ ਥੜੇ ਦੇ ਉੱਤੇ ਉਹਨੇ ਕਿਓ ਮੰਗਿਆ ਜਾ ਕੇ ਮੈਨੂੰ ਕਿਓ ਦਿਓ ਉਹਨਾਂ ਆਖਿਆ ਕਰਨਾ ਕੀ ਹੈ ਉਹਨਾਂ ਆਖਿਆ ਮੈਂ ਦੀਵਾ ਜਗਾਉਣਾ ਉਹਨਾਂ ਨੂੰ ਸਤਗੁਰਾਂ ਦੇ ਉਸ ਥੜੇ ਦੇ ਉੱਤੇ ਤੇ ਮੈਂ ਦੀਵਾ ਜਗਾਉਣਾ ਮੈਨੂੰ ਕਿਓ ਦੇ ਦੇ ਕਰਤਾਰ ਸਿੰਘ ਨੇ ਆਖਿਆ ਮੈਂ ਦੀਵਾ ਜਗਾਉਣ ਵਾਸਤੇ ਕਿਓ ਨਹੀਂ ਦੇਣਾ ਜੇ ਖਾਣ ਵਾਸਤੇ ਲੈਣੇ ਤੇ ਲੈ ਸਕਦੇ ਉਹਨਾਂ ਆਖਿਆ ਮੈਂ ਤੇ ਝੂਠ ਨਹੀਂ ਬੋਲਣਾ ਮੈਂ ਤੇ ਉੱਥੇ ਦੀਵਾ ਹਰ ਰੋਜ਼ ਜਗਾਉਣਾ ਦੀਵਾ ਜਗਾ ਮਗਾ ਆਖਿਆ ਮੈਂ ਕਿਓ ਨਹੀਂ ਦੇਣਾ ਇਸ ਗੱਲ ਤੋਂ ਇਹਨਾਂ ਦਾ ਉੱਚੀ ਉੱਚੀ ਬੋਲ ਬਣਾ ਰਾ ਹੋ ਗਿਆ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਪਤਾ ਲੱਗਾ ਸੱਚੇ करतार ਲੰਗਰ ਵਿੱਚ ਪਹੁੰਚੇ ਕਰਤਾਰ ਸਿੰਘ ਨੂੰ ਪੁੱਛਿਆ ਕਰਤਾਰ ਸਿੰਘ ਤੁਸੀਂ ਉੱਚੀ ਉੱਚੀ ਬੋਲਦੇ की ਕੀ ਗੱਲ ਹੈ ਉਹ ਬੇਨਤੀ ਕੀਤੀ ਸੱਚ ਅਜੀ ਜੋਤ ਜਪੈਂਦੀ ਰਾਤ ਜਾਗਤ ਜੋਤ ਜਪੈਂ jot jab jagat jagat jot jap jab ye jyot jap dil raat jagat jot jap joot jap jab dil raat jagat jot jap ਰਿਆਸਾ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾ ਪੁੱਛਿਆ ਜਾ ਕੇ ਕਰਤਾਰ ਸਿੰਘ ਹੋਈ ਐ ਉਹਨਾਂ ਸੱਚੇ ਪਾਤਸ਼ਾ ਫਲਾਣਾ ਸਿੱਖ ਮੰਗਦਾ ਸੀ ਤੇ ਮੈਂ ਕਿਉ ਨਹੀਂ ਦਿੱਤਾ ਉਹ ਕਾਦੇ ਵਾਸਤੇ ਜੀ ਉਹ ਕਹਿੰਦਾ ਸੀ ਕਿ ਮੈਂ ਉਹ ਸਤਗੁਰੂ ਹਰੀ ਸਿੰਘ ਜੀ ਦੇ ਜਿਹੜਾ ਥੜਾ ਬਣਿਆ ਹੋਇਆ ਉੱਥੇ ਮੈਂ ਦੀਵਾ ਜਗਾਉਣਾ ਤੇ ਮੈਂ ਉਹ ਦੀਵਾ ਜਗਾਉਣ ਵਾਸਤੇ ਕਿਉ ਨਹੀਂ ਦਿੱਤਾ ਐਸ ਗੱਲ ਤੋਂ ਉੱਚੀ ਉੱਚੀ ਬੋਲਦੇ ਪਏ ਸਾ ਤੇ ਤੁਸੀਂ ਆਏ ਹੋ ਸੱਚੇ ਪਾਤਸ਼ਾਹ ਕਿਰਪਾ ਕਰਕੇ ਤੇ ਫੈਸਲਾ ਕਰ ਜਾਓ ਇਹ ਮੈਂ ਇਹ ਕਿਸ ਤਰ੍ਹਾਂ ਕੀਤਾ ਜਾਏ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਕੀਤਾ ਤੂੰ ਬਹੁਤ ਚੰਗਾ ਕੀਤਾ ਇਹ ਜਿਹੜਾ ਨਹੀਂ ਦੀਵਾ ਘੋ ਦਿੱਤਾ ਦੀਵਾ ਜਗਾਉਣ ਵਾਸਤੇ ਇਸ ਤਰ੍ਹਾਂ ਅਸਾਂ ਨਹੀਂ ਕਰਨ ਦੇਣਾ ਸਤਿਗੁਰੂ ਆਖਿਆ ਇਹ ਤੇ ਮੇਰੇ ਵੱਲ ਰਹੀ ਆ ਕੋਸ਼ ਇਹਦਾ ਫੈਸਲਾ ਕੱਲ੍ਹ ਕਰ ਹੀ ਦੇਾਂਗੇ ਅਗਲੇ ਦਿਨ ਸੱਚੇ ਪਾਤਸ਼ਾਹ ਸਵੇਰੇ ਆਸਾ ਦੀ ਤੋਂ ਉੱਠੇ ਉਹ ਟਿਕਟ ਦੇ ਨਾਲ ਜਿੰਨੇ ਸਾਧੂ ਸੰਤ ਮਹਾਤਮਾ ਸਰ ਨਾਲ ਲਿਆ ਉੱਥੇ ਜਾ ਕੇ ਖਲੋਤੇ ਕਿ ਦੋ ਕਈਆਂ ਮੰਗਾਈਆਂ ਕਈਆਂ ਰਿਹਾ ਦੋ ਤਿੰਨ ਜਾ ਕੇ ਆ ਗਈਆਂ ਸਾਡੇ ਉੱਥੇ ਦਿੱਲੀ ਵਿੱਚ ਹਰਨਾਮ ਸਿੰਘ ਜਿਹਨੂੰ ਨਾਚਾ ਕਹਿੰਦੇ ਸਨ ਹਰਨਾਮ ਸਿੰਘ ਦਲੇਰ ਉਹ ਕਹਿੰਦੇ ਸੀ ਮੈਂ ਨਾ ਹਾਂ ਉਸ ਦਿਨ ਇੱਕ ਕਈ ਉਹਦੇ ਹੱਥ ਚ ਇੱਕ ਸਤਿਗੁਰ ਆਪ ਫੜੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜੁੱਥੇ ਉਰ ਜਿਹੜਾ ਉੱਥੇ ਦੀਵਾ ਸੀ ਨਾ ਵੱਡਾ ਸਾਰਾ ਪਿਆ ਹੋਇਆ ਚਲਾ ਕੇ ਮਾਰਿਆ ਦੂਰ ਉੱਥੇ ਦੀਵੇ ਨੂੰ ਚਲਾ ਕੇ ਮਾਰਿਆ ਜਸਵੰਤ ਤੇ ਮਾਤਾ ਜੀਵਨ ਕੌਰ ਜੀ ਨੂੰ ਪਤਾ ਲੱਗਾ ਭਈ ਉਹ ਥੜਾ ਢਾੜਣ ਲੱਗੇ ਮਾਤਾ ਜੀ ਆਏ ਸਤਿਗੁਰਾਂ ਕੇ ਸਤਗੁਰਾਂ ਨੂੰ ਆਖਿਆ ਤੁਹਾਡੇ ਪਿਤਾ ਦਾ ਅਸਥਾਨ ਹੈ ਇਹ ਢਾਓ ਨਾ ਸਤ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ ਤੁਹਾਡੀ ਡਿਊਟੀ ਆ ਲੰਗਰ ਵਿੱਚ ਤੁਸੀਂ ਲੰਗਰ ਵਿੱਚ ਜਾਓ ਮੈਂ ਇਹਨੂੰ ਧੋਣ ਨਹੀਂ ਲੱਗਾ ਮੈਂ ਬਣਾਉਣ ਲੱਗਾ ਉਹ ਚੁੱਪ ਕਰਕੇ ਲੰਗਰ ਚ ਚਲੇ ਗਏ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਢੜਾ ਢਾ ਕੇ ਸਭਾ ਕੀਤਾ ਸਾਫ ਕਰਕੇ ਤੇ ਅਰਦਾਸ ਕਰਵਾਈ ਅਰਦਾਸ ਕਰਕੇ ਤੇ ਉੱਥੇ ਹਰੀ ਮੰਦਰ ਦੀ ਨੀ ਰੱਖੀ ਇਹ ਹਰੀ ਮੰਦਰ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਪਹਿਲਾਂ ਇੱਥੇ ਨਹੀਂ ਰੱਖੀ ਸੀ ਜਿਹੜਾ ਅੱਜ ਵਰਤਮਾਨ ਸਤਗੁਰੂ ਜੀ ਨੇ ਇਹਦਾ ਵਿਕਾਸ ਕੀਤਾ ਤੇ ਬਹੁਤ ਹੀ ਸੁੰਦਰ ਬਣਾਇਆ ਇਹ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਉਹ ਥਾਂ ਤੇ ਬਣਾਇਆ ਜਿੱਥੇ ਸਤਗੁਰੂ ਹਰੀ ਸਿੰਘ ਜੀ ਦਾ ਅੰਤਮ ਸੰਸਕਾਰ ਹੋਇਆ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਸਾਨੂੰ ਗੁਰਬਾਣੀ ਵਿੱਚ ਹੁਕਮ ਹੈ ਕਿ ਨਿਰਜੀਓ ਪੂਜੈ ਮੜਾ ਸਰੇਵੇ ਸਭ ਬਿਰਥੀ ਕਾਲਗਵਾ ਇਹ ਤੇ ਹੁਕਮ ਕੀ ਕੀਤਾ ਹੁਕਮ ਹੀ ਹੋਇਆ ਸੀ ਇਹ ਜੀ ਜੋਤ ਜਪੈ ਜਿੰਨ ਜਾਗਤ ਜੋਤ ਜਪੈ ਜਪੈ ਜਿੰਨ tapen raat jagat jyot japa jyot japa dil raat jagat jyot japa jyoti jala jagat jyot japa aaj jyagat jyot japa jagat jyot japa aagat jyot japai dil raat jagat jyot japai dil raat jagat jyot japai dil raat jagat jyot japai dil raat jagat jyot japai dil raat ਕਿਆ ਸਾਨੂੰ ਹੁਕਮ ਨਹੀਂ ਇਸ ਤਰ੍ਹਾਂ ਕਰ ਰਿਹਾ ਸਾ ਗੁਰਬਾਣੀ ਵਿੱਚ ਹੁਕਮ ਆਇਆ ਕਿ ਜੀਵਨ ਕਿਦਾ ਬਣਾ ਜੋ ਜਾਗ ਦੀ ਜੋਤ ਨੂੰ ਪੂਜਦਾ ਤੇ ਮੰਨਦਾ ਜਿਹੜਾ ਜੀਉਂਦੇ ਨੂੰ ਮੰਨਦਾ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਗੁਰ ਦਾ ਜੀਵਨ ਵਧੀਆ ਕਿਸ ਤਰ੍ਹਾਂ ਬਣਦਾ ਜਿਉਂਦਾ ਕੌਣੇ ਸੰਸਾਰ ਵਿੱਚ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੋ ਜੀਵਤ ਜਿਹੇ ਜੀਵਤ ਜਪਿਆ ਜਿਉਂਦੇ ਉਹਨੇ ਸੰਸਾਰ ਵਿੱਚ ਜਿੰਨਾ ਜੀਉਂਦੇ ਨੂੰ ਜਪਿਆ ਪਰ ਇਹਦਾ ਸ਼ੰਕਾ ਗੁਰੂ ਅਮਰਦਾਸ ਨੇ ਬਹੁਤ ਸ਼ਪਸ਼ਟ ਸ਼ਬਦਾਂ ਵਿੱਚ ਬਿਆਨ ਕੀਤਾ ਹੋਇਆ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਗੁਰਮੁਖ ਜਨਮ ਸਰਕਾਰ ਥਾ ਨਿਰਮਲ ਮਲਕ ਹੋਈ ਉਹਨਾਂ ਗੁਰਮਖਾਂ ਦਾ ਗੁਰਸਿੱਖਾਂ ਦਾ ਜਨਮ ਸਫਲ ਹੁੰਦਾ ਤੇ ਉਹ ਨਾਮ ਮਨਦਰਮਲ ਹੋ ਜਾਂਦਾ ਕਿੰਨਾ ਦਾ ਕਹਿੰਦੇ ਨੇ ਨਾਨਕ ਜੀ ਮਨ ਦਾ ਪੁਰਖ ਤੇ ਆਇਆ ਅਮਰ ਅਪਦ ਹੋਈ ਜਿਨ੍ਹਾਂ ਨੇ ਜਿਉਂਦੇ ਨੂੰ ਧਿਆਇਆ ਜਿਨ੍ਹਾਂ ਨੇ ਜਿਉਂਦੇ ਦਾ ਧਿਆਨ ਧਰਿਆ ਜਿਨ੍ਹਾਂ ਨੇ ਜਿਉਂਦੇ ਨੂੰ ਹਿਰਦੇ ਵਿੱਚ ਵਸਾਇਆ ਜਦੀ ਬਾਬਤ ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰੂ ਕੀ ਮੂਰਤ ਹਿਰਦੇ ਵਿੱਚ ਵਸਾਉਣੀ ਇਹਦਾ ਨਾਮ ਹੈ ਜਾਗਤ ਜੋਤ ਤੋਂ ਮੈਂ ਅਰਜ ਕੀਤਾ ਸਿਜਾ ਜੇ ਕਿ ਦੁਨੀਆ ਵਿੱਚ ਦੋ ਪ੍ਰਕਾਸ਼ ਦੋ ਪ੍ਰਕਾਰ ਦਾ ਪ੍ਰਕਾਸ਼ ਆ ਇੱਕ ਜੜ ਪ੍ਰਕਾਸ਼ ਤੇ ਇੱਕ ਚੇਤਨ ਪ੍ਰਕਾਸ਼ ਜਾਗਤ ਜੋਤ ਤੋਂ ਭਾਵ ਹੁੰਦਾ ਹੈ ਚੇਤਨ ਪ੍ਰਕਾਸ਼ ਜਿਹੜਾ ਚੱਲਦਾ ਫਿਰਦਾ ਪ੍ਰਕਾਸ਼ ਹੈ ਇਸ ਵਾਸਤੇ ਸਾਡੇ ਗੁਰੂ ਸਾਹਿਬਾਂ ਨੇ ਜਿੱਥੇ-ਜਿੱਥੇ ਵੀ ਜਾ ਕੇ ਉਪਦੇਸ਼ ਦਿੱਤੇ ਉੱਥੇ ਰੋਸ਼ਨੀ ਹੋਈ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਨਾਮ ਬਾਣੀ ਤੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਐਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਾਗ ਦੀ ਜੋਤ ਨੇ ਆਣ ਕੇ ਕਿਰਪਾ ਕੀਤੀ ਤੇ ਉਹ ਮਰਜ਼ਾਦਾ ਅੱਜ ਤੱਕ ਚੱਲ ਰਹੀ ਐ ਉਹ ਕਬੀਰ ਕਹਿੰਦਾ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਤਰ ਹਰ ਰਾਇ ਸਾਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਰੱਖ ਲਿਆ ਜੜ ਪੂਜਾ ਤੋਂ ਨਾਮ ਨੂੰ ਨਹੀਂ ਤੇ ਦੁਨੀਆ ਸਾਰੀ ਪੂਜਦੀ ਐ ਕਬੀਰ ਕਹਿੰਦੇ ਕਬੀਰ ਕਹਿੰਦਾ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਤੇ ਇਹ ਸੁਪਰਵਾਸੇ ਜੋ ਰਹੇ ਤੇ ਬੁੱਢੇ ਕਾਲੀ ਤਾਰ ਇਹ ਸੁਪਰਵਾਸੇ ਜੋ ਰਹੇ ਜੇ ਕਾਲ kali taru ute kali taru ute kali taru o yesu parwaase jo rahe ute kali taru yesu parwaase jo rahe ute kali taru ਗੱਟੀ ਮਨ ਸਫਲਾ ਜਿਹੜਾ ਜੀਉਂਦੇ ਨੂੰ țieਉਂਦੇ ਨੂੰ ਤੇ ਜੀਉਂਦੇ ਨੂੰ ਮੰਨਦੇ ਸਭ ਕਿਰਪਾ ਕਰਕੇ ਜਾਗਦੀ ਜੋਤ ਦਾ ਧਿਆਨ ਰੱਖਿਆ ਕਰੋ ਜਾਗਦੀ ਜੋਤ ਕਹਿੰਦੇ ਨੇ ਚੇਤਨ ਪ੍ਰਕਾਸ਼ ਨੂੰ ਜਿਹੜਾ ਚੱਲਦਾ ਫਿਰਦਾ ਪ੍ਰਕਾਸ਼ ਸੂਰਜ ਜਿਹੜਾ ਇਹ ਚੱਲਦਾ ਫਿਰਦਾ ਪ੍ਰਕਾਸ਼ ਹੈ ਤੇ ਦੀਵਾ ਜੜ ਪ੍ਰਕਾਸ਼ ਦੀਵਾ ਸਾਡੇ ਅਧੀਨ ਸੂਰਜ ਸਾਡੇ ਅਧੀਨ ਇਸ ਵਾਸਤੇ ਸਤਿਗੁਰੂ ਗੁਰੂ ਹਸਤੀ ਨੂੰ ਸੂਰਜ ਦਾ ਪ੍ਰਮਾਣ ਦਿੱਤਾ ਸੂਰਜ ਦਾ ਬਰਾਬਰੀ ਦਿੱਤੀ ਆ ਭਾਈ ਗੁਰਦਾਸ ਕਹਿੰਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਸ਼ੁਰੂ ਕੀਤਾ ਸੀ ਕਿ ਜਾਗਤ ਜੋਤ ਜਪੈ ਨਿਸਬਾ ਏਕ ਬਿਨਾ ਮਨ ਨੈਕ ਨਾ ਆਨਾ ਪੂਰਨ ਪ੍ਰੇਮ ਪ੍ਰਤੀਤ ਸੱਜਾ ਬ੍ਰਤ ਗੋਰ ਮੜੀ ਮਠ ਫੂਲ ਨਾ ਮਾਨਾ ਇਧਰ ਭੁੱਲ ਕੇ ਵੀ ਨਾ ਜਾਇਆ ਕਰੋ ਸਾਡੇ ਨਾਮ ਧਾਰੀਆਂ ਵਿੱਚ ਕਈ ਬੜੇ ਫਾਂਡਿਆ ਵਾਲਿਆ ਕੋਈ ਜਨ ਲੱਗ ਪਰੇ ਲੋਕੀ ਕਿਰਪਾ ਕਰਕੇ ਗੁਰੂ ਚਰਨਾ ਤੇ ਭਰੋਸਾ ਰੱਖ ਕੇ ਤੇ ਇੱਥੇ ਸ੍ਰੀ ਪੈਣੀ ਸਾਹਿਬ ਆਣ ਕੇ ਬੇਨਤੀ ਕਰਿਆ ਕਰੋ ਸਤਿਗੁਰਾਂ ਦੇ ਚਰਨਾ ਵਿੱਚ ਸਾਡੇ ਕੋਲ ਜਾਗਦੀ ਝੋਤ ਹੈ ਨਾ ਜਾਇਆ ਕਰੋ ਮੈਂ ਇਹਨੀਆਂ ਬੇਨਤੀਆ ਕਰਦਾ ਹੋਇਆ ਹੁਕਮਸ਼ੀ 2 ਮਿੰਟ ਪਹਿਲਾਂ ਸਮਾਪਤ ਕਰਨ ਦਾ ਇੱਥੇ ਸਮਾਪਤੀ ਹੈ ਬੋਲ ਚੁੱਕ ਮਾਫ ਕਰਨਾ ਸਤਿ ਸ੍ਰੀ ਅਕਾਲ